श्लोक मोहल्ला 5वां जाचक मांगै दान देह प्यारिया देवण हार दाता मैं नित चितारिया जाचक दान अस जाचक मुग दे दूए दान दे हे दे प्यार वाले को मैं भरोसा होवे ਠੀਕ ਹੈ ਜੀ ਦੂਜੇ ਕੋਲ ਦੂਜੇ ਕੋਲ ਪਹਿਲਾਂ ਤਾਂ ਪਤਾ ਹੋਵੇ ਵੀ ਇਹ ਕੋਲ ਹੈਗਾ ਪਿਆਰ ਤੇ ਬਿਨੋਂ ਦਾ ਭੇਜ ਤੇ ਵੀ ਉਦਾਂ ਠੀਕ ਹੈ ਜੀ ਜੋ ਗਾਇਦਾ ਮੇਰੇ ਕੋਲ ਤਾਂ ਹੈ ਹੀ ਤੇਰੇ ਕੋਲ ਦਾਨ ਹੈਗਾ ਜਿਹੜਾ ਵੀ ਤੂੰ ਚਾਹਦਾ ਸੋ ਜਾਤਿਕਾਂ ਤੇਰਾ ਮੇਰੇ ਦਾਨ ਮੰਗਦਾ ਮੈਨੂੰ ਦੇ ਕੀ ਆ ਰੋਬ ਦਾ ਹੈ ਦਾ ਕਾਲ ਬ ਦਿੱਤ ਚਤਾਰਿਆ ਅਜਿਹੇ ਦੇਵ ਨਾਲ ਦਾਤਾਰ ਹੈ ਮੈਂ ਤਾਂ ਦਿੱਤ ਜਿਤੇ ਚਿੱਤੇ ਚ ਰੱਖਿਆ ਹੋਇਆ ਇਹ ਮੇਰਾ ਤਾਂ ਦਿੱਤਾ ਇਹਦੇ ਵਿੱਚ ਨਾਨਕ ਸ਼ਬਦ ਆਧਾਰ ਤਿੰਨ ਸਭ ਕੁਝ ਸਾਰਿਆ ਨਿਖੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਇਹ ਤਾਂ ਕੋਈ ਡਾ ਬੜਾ ਬਣਾ ਰੰਦਾ ਗਲਤ ਇਹ ਘਟਣ ਬੁੱਕਣ ਵਾਲਾ ਨਹੀਂ ਹੈਗਾ ਕੋਟੜਾ ਜਾਈ ਬੂਲੋ ਤੁੱਲ ਬਣਾ ਲਿਆ ਤੁੱਲ ਬਣਾ ਰੇ ਤੇ ਕੋਲ ਇਹਦਾ ਵੀ ਕੁਝ ਵੀ ਘਟਦਾ ਜਦੋਂ ਮਰਜੀ થઈ ਜਾਵੇ ਕੋਈ ਕੀ ਹੋਣਾ ਪਦਕਾਰੂ ਗੱਲ ਇਹ ਟੋਟਣ ਵਾਲੇ ਇਹਦੇ ਜਿ ਕੁਝ ਨਹੀਂ ਹੈਗਾ ਸਾਰੇ ਆਈ ਜਾਓ ਲਈ ਭਰ ਕੇ ਨ ਤੋਂ ਲ ਬਣਾ ਲਿਆ ਸ਼ਬਦ અપਾਰ ਜੇ ਤੂੰ ਸਭ ਕੀ ਸ਼ਬਦ ਅਪਾਰ ਹੈ ਉਹ ਉਪਦੇਸ਼ ਹੈ અપਾਰ અપਾਰ ਕਾਤੇ ਕੀ ਹੈ ਭਾਇਆ ਤੋਂ ਪਰੇ ਦਾ ਉਪਦੇਸ਼ ਹੈ ਭਾਇਆ ਤੋਂ ਪਰੇ ਕਿਵੇਂ ਨਾ ਭਾਇਆ ਤੋਂ ਪਰੇ ਕਿਵੇਂ ਬਹੁਤ ਜਣ ਜਾਣਾ ਹੈ ਇਹ ਉਪਦੇਸ਼ ਹੈ ਜੇ ਤੂੰ ਸਭ ਇਹਦੇ ਸਾਰੇ ਅਰਥ ਸਾਰੇ ਸਾਰੇ ਕਾਬੂ ਸਾਤੇ ਉਹ ਗੜਵੀ ਬਟਾਤੇ ਉਹੜ ਵੀ ਪੈਦਾ ਕਰਤੇ ਮੂਲ ਲਿਖਿਆ ਨਿਖੁੱਟਣਾ ਜਾਈ ਮੂਲ ਮੂਲ ਇਹ ਗਾਂ ਸ਼ਬਦ ਵਾਸਤੇ ਕਿਹਾ ਜਿਹੜਾ ਅੱਗੇ ਫਿਰ ਸ਼ਬਦ ਆਧਾਰ ਨਹੀਂ ਨਹੀਂ ਘਟਦਾ ਅੱਛਾ ਜੀ ਵੀ ਹੀ ਰਹਿੰਦਾ ਜਿੰਨਾ ਮਰਜੀ ਵੰਡਿਆ ਜਾਵੇ ਉਹ ਹੀ ਰਹਿੰਦਾ ਆਓ ਵੀਡੀ ਘਟਦਾ ਹੁਣ ਇੱਥੇ ਮੁਰਦਾ ਸੱਤੀ ਜਿੱਦਾਂ ਆ ਜਾਊਗਾ ਅੱਛਾ ਜੀ ਘਟਦਾ ਨਹੀਂ ਸਗੋਂ ਵੱਧਦਾ ਹੀ ਹੈ ਠੀਕ ਹੈ ਟੋਟਣਾ ਆਪ ਵੱਧ ਹੋ ਜਾਈ ਹੈ ਜੀ ਹਾਂ ਠੀਕ ਹੈ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪਿਆਰੇ ਗੁਰ ਸਿੱਖੋ ਜਿਹੜਾ ਸ਼ਬਦ ਹੈ ਉਪਦੇਸ਼ ਹੈ ਗੁਰੂ ਦਾ ਇਹਦਾ ਉਪਦੇਸ਼ ਕਰਨ ਦੀ ਗੁਰਬਾਣੀ ਜਾਨੂੰ ਰੋਕ ਦਿੰਦਾ ਹੈ ਤੇ ਇਸ ਦਾ ਮੁੱਢ ਰੋਕ ਦਿੰਦਾ ਹੈ। ਧੋਣਾ ਜਾਣਾ ਕੱਟ ਦਿੰਦਾ ਹੈ। ਗਾਂ ਨੂੰ ਦੀ ਰਹੋ। ਜਾਨੂੰ ਮਾਰਨ ਕੀ ਟੇਕ ਜਾਨੂੰ ਬਲ ਟਿਕ ਜਾਂਦਾ ਰੁਕ ਜਾਂਦਾ ਹੈ। ਮੁੱਖੋ ਸਦਾ ਸੁਖੀ। ਦਰਗਾਹ ਮੁੱਖ ਸਦਾ ਉਜਲ ਰਹਿੰਦਾ। ਸਿੱਕਾ ਦੀ ਪੈਂਦਾ ਚਿਹਰਾ ਕਦੇ ਵੀ ਕੋਈ ਜਲ ਜੇ ਆਪੇ ਆਪ ਨੂੰ ਆਤਮ ਗਿਆਨੀ ਹੋ ਜਵੇ ਆਤਮ त्यागी ਹੋ ਜਵੇ ਤਾਂ ਟਿਕ ਜਾਂਦਾ ਹੈ ਹੋ ਜਾਂਦਾ ਆਪਣੇ ਆਪ ਦੇ ਨਾਲ ਜੁੜ ਜਾਂਦਾ ਇਹ ਦੇਖੋ ਵੀ ਜਿਹੜਾ ਸਿੱਖੋ ਅੱਖਰ ਹੈ ਕਿ ਆ ਇਹ ਨਾਉਨ ਹੈ ਕਿ ਇਹ ਵਰਬ ਹੈ ਸਿੱਖੋ ਤਾਂ ਨਾਉਨ ਹੈ ਸਿੱਖਾ ਨੂੰ ਬਦੇ ਸਿੱਖਾ ਨੂੰ ਵਰਬ ਹੋਦਾ ਹੈ ਦਾ ਹੋਇਆ ਠੀਕ ਹੈ ਤੇ ਕੋਈ ਨਹੀਂ ਉਹਦਾ ਸ਼ਬਦ ਸਿੱਖੀ ਦਾ ਨਹੀਂ ਸਭ ਸੁਣੀਦਾ ਹੁੰਦਾ ਸਿੱਖਾਂ ਨੂੰ ਸਬੂਤਨ ਕਰਕੇ ਕਿਹਾ ਕਿ ਕੋ ਸ਼ਬਦ ਪਿਆਰਿਓ ਹੈ ਗੁਰਸਿੱਖ ਪਿਆਰਿਓ ਸ਼ਬਦ ਉਪਦੇਸ਼ ਵੀ ਰੋ ਸੁਰਦਿਉ ਸਿੱਖ ਕਹੇ ਉਹ ਨੂੰ ਚਾਹੁੰਦਾ ਜਿਹੜਾ ਰੋ ਸੁਣਦਾ ਜਿਹੜਾ ਡੇੜੇ ਨਹੀਂ ਉਹਦਾ ਸਿੱਖ ਜਿਹੜਾ ਸੰਗਤ ਕਰਦਾ ਉਹੀ ਸਿੱਖ ਉਹਨਾਂ ਨੂੰ ਹੀ ਕਿਹਾ ਹੋਇਆ ਠੀਕ ਹੈ ਕੀ ਤੇ ਕਹ ਇਦ ਕਿ ਹੈ ਪੰਜਵੇਂ ਪਾਤਸ਼ਾਹ ਦੇ ਛੁਰਦੇ ਤਾਂ ਹੋਰ ਵੀ ਤੇ ਉਹਨਾਂ ਨੂੰ ਕਿਹਾ ਉਹ ਮੈਨੂੰ ਟਕਾ ਗਿਆ ਤੁਹਾਨੂੰ ਵੀ ਆਜੂ ਲਲਾ ਹੈ ਗਵਾਹੀ ਦਿੱਤੀ ਹੈ ਜਿਹਨੂੰ ਟਕਾ ਗਿਆ ਉਹਨੇ ਗਵਾਹੀ ਦਿੱਤੀ ਹੈ ਆਪਣੇ ਵਾਸਤਾ ਬਿਆਨ ਕਰੀ ਗਿਆ ਮੈਨੂੰ ਐ ਹੋ ਗਿਆ ਤੁਹਾਨੂੰ ਕਿਵੇਂ ਨਹੀਂ ਹੋਊ ਆ ਗੱਲ ਜਿਵੇਂ ਉਹ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਿ ਮੈਨੂੰ ਸੁਖ ਮਿਲ ਰਿਹਾ ਤੁਹਾਨੂੰ ਵੀ ਜ਼ਰੂਰ ਮਿਲੇਗਾ ਸਿਮਰੂਗਾ ਤੇ ਸੁਖ ਤਾਂ ਮਿਲੂਗਾ ਪੌੜੀ ਉਥੇ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ ਜਮ ਕੇ ਪੰਥ ਨ ਨਾ ਹੀ ਮਰਨੇ ਉਥੇ ਅੰਮ੍ਰਿਤ ਵੰਡੀਐ ਉਥੇ ਦਾ ਉਪਰਤ ਵੰਡੀ ਦਾ ਸੁਖੀਆ ਹਰ ਕਰਨੇ ਦੇ ਕਾਦੇ ਵਾਸਤੇ ਵੰਡੀ ਦਾ ਉਬਰਤ ਉਹ ਸਾਰਿਆਂ ਨੂੰ ਸੁਖੀ ਕਰਨ ਵਾਸਤੇ ਅੰਮ੍ਰਿਤ ਵੰਡਦੇ ਨੇ ਸੁਖੇ ਸੁਖ ਹੋਣ ਦੋਈ ਹੋਵੇ ਕੋਈ ਉੱਤੇ ਅਮਰ ਬੰਦੀਆ ਸੁਖਿਆ ਹਰ ਕਰਨਾ ਹਰ ਰਬਤ ਬਣਦਾ ਸੁਖੀ ਕਰਨ ਵਾਸਤੇ ਸਾਰਿਆਂ ਨੂ ਸੁਖ ਦੇਣ ਵਾਸਤੇ ਜਬਕੇ ਪੰਥਨ ਪਾਈਏ ਫਿਰ ਨਹੀਂ ਬੰਦੇ ਜਾਂ ਜਬਕੇ ਪੰਥ ਜਾਊਗਾ ਹੀ ਮਰਨਾ ਚਾਹਦਾ ਉਹ ਰਾਹੇ ਨਹੀਂ ਜਾਊ ਉਹ ਰਾਸਤੇ ਨਹੀਂ ਜਾਊ ਮਰਨਾ ਚਾਹਦਾ ਹੈ ਪ੍ਰੇਮ ਰਸ ਤੇ ਸਹੀ ਜਿਹੜਾ ਜੀ ਨੂੰ ਪ੍ਰੇਮ ਰਸ ਆ ਗਿਆ ਉਹੀ ਇਹ ਜਿਹੜੇ ਤਿੱਖੇ ਤੀਰ ਨੇ ਚੱਲਦਾ ਦੇ ਬਾਣ ਗੱਤੀ ਪਾੜ ਦਿੰਦੇ ਨੇ ਬਾਣੀ ਦੇ ਬਾਣ ਦੇ ਗੁਰਬਾਣੀ ਬੰਦ ਮਾਰਿਆ ਆਣੇ ਤੀਰ ਉਹੀ ਚੱਲਦਾ ਛਾਤੀ ਚ ਖੰਦਾ ਤੜਾ ਹੋ ਕੇ ਮਾਰ ਦਿਖਾ ਸਕਦੇ ਜੇ ਗੁਰ ਚਟਕੇ ਮਿੱਠਾ ਲੱਗਦਾ ਉਹਨਾਂ ਨੂੰ ਮਿੱਠਾ ਲੱਗਦਾ ਪਹਿਲਾਂ ਦੱਸੋ ਵੀ ਉਥੇ की है ਜਿੱਥੇ ਲਿਖਿਆ ਉਥੇ ਅੰਮ੍ਰਿਤ ਵੰਡਿਆ ਇਹ ਉਥੇ ਕਿਹੜੀ ਜਗ੍ਹਾ ਹੈ ਜੀ ਦਿੱਤਿਆ ਉਹਦੇ हो ਸੰਗਤ ਦੇ ਵਿੱਚ ਅੱਛਾ ਜੀ ਕਿਉਂਕਿ ਅੰਮ੍ਰਿਤ ਤੋਂ ਬਹੁਤ ਭਨੇਖਾ ਪੈਂਦਾ ਹੈ ਕਿ ਇਹ ਪੌਹਲ ਦੀ ਗੱਲ ਨਹੀਂ ਹੋ ਰਹੀ ਉਹ ਉਹਨਾਂ ਨੂੰ ਗਿਆ ਉਹ ਅੰਮ੍ਰਿਤ ਜਿਹਨੂੰ ਪ੍ਰੇਮ ਦਾ ਨਾ ਹਰੇਕ ਤੀਰ ਚ ਪ੍ਰੇਮ ਦਾ ਸੌਂਦਾ ਉਹ ਤੀਰ ਦੇ ਜਾਂਦੀ ਦੂਆ ਕਰਦੇ ਦੂਆਲ ਤੇ ਸੱਚ ਕੋੜਾ ਲੱਗਦਾ ਉਹਨੂੰ ਉਹਦੇ ਨਾਲ ਸ਼ਾਂਤੀ ਪ੍ਰੇਮ ਦਾ ਮਤਲਬ ਹੁੰਦਾ ਜੁੜਨਾ ਜੀ ਇਹ ਚੀਜ਼ ਨਾਲ ਸੁੱਖ ਮਿਲੇ ਨਾ ਉਹ ਹੋਰ ਮਿਲੇ ਤਾਂ ਸਾਡਾ ਉਹਦਾ ਪ੍ਰੇਮ ਕੇ ਰੱਖੀ ਦੀ ਹੈ ਠੀਕ ਹੈ ਜੀ ਜਦੋਂ ਮਨ ਵਿੱਚ ਤਾਪਸ ਤੇ ਆ ਇਹਨੂੰ ਪ੍ਰੇਮ ਰਸ ਨਹੀਂ ਕਹਿੰਦੇ ਬਿਲਕੁਕੁਲ ਹਾਂ ਬੋਲਦਾ ਕਹਿੰਦੇ ਜ ਪ੍ਰੇਮ ਰਸ ਹੈ ਇਹ ਗਾਣੀ ਉੱਚਰੇ ਸਾਧ ਜਨ ਅਮਿਓ ਚੱਲੇ ਚਰਨੇ ਗਾਣੀ ਉੱਚਰੇ ਸਾਧ ਜਨ ਅਬਿਓ ਚੱਲਨੇ ਚਰਨੇ ਜਾਂ ਸਾਧ ਜਨ ਬਾਣੀਆਂ ਚਾਲ ਤੇ ਨੇ ਅਮਰ ਦੇ ਚੱਲਦੇ ਹੁੰਦੇ ਨੇ ਉਹ ਉਸੇ ਕੋਈ ਸੰਬੰਧੀ ਹੈ ਕਿਹਾ ਹੋਇਆ ਜਾ ਬਾਣੀ ਬੋਲਦੇ ਨੇ ਪਰਦੇ ਚੱਲਦੇ ਚੱਲਦੇ ਨੇ ਉਸੇ ਨੂੰ ਗੁਰਤਬੰਦੀ ਇਹ ਕਿਹਾ ਹੋਇਆ ਠੀਕ ਹੈ ਗੁਰਬਾਣੀ ਨੂੰ ਸ਼ਬਦ ਨੂੰ ਇਹਨਾਂ ਦੀਵਾਨ ਨੂੰ ਅੰਮ੍ਰਿਤ ਕਿਹਾ ਹੈ ਤੋਤੇ ਦੀ ਕਹਿਣ ਲੱਗੇ ਬਾਣੀ ਛੱਡਤੀ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸਰਬੰਦੇ ਅੰਦਰ ਤਹਲੀਦ ਹੈ ਗੁਰਬਾਣੀ ਸਾਰੀ ਤੋ ਆਦੋਂ ਦਰਸ਼ਨ ਹੋ ਗਿਆ ਵੇਖ ਵੇਖ ਲਿਆ ਆਪਣਾ ਦੂੜ ਵੀ ਪਛਾਣ ਲਿਆ ਆਪਣਾ ਆਪਾ ਵੀ ਦੇਖ ਲਿਆ ਵਾਜੀਪਿਆ ਵੇਖ ਦਰਸ਼ਨ ਹੋਰ ਕੀ ਕੀ ਪਿਆ ਬਲੰਦ ਦਸਤ ਜੋ ਗੁਰੂ ਨੇ ਕਿਹਾ ਜੋ ਗੁਰੂ ਦਾ ਬਨੇ ਦ ਹੀ ਮਨ ਦੇ ਵਿੱਚ ਧਾਨ ਕਰ ਲਿਆ ਵਾਜੀਪਿਆ ਇਹ